शलोक महल्ला चौथा सब कोई है खसम का खसमे सबको होए हुकम पहचाने खसम का ता सच पावे कोई हां खसम तो कोई सारे अंदर आत्मा है कोई आत्मा के जाने आपा वो छठे अंदर का सारे सारे भी प्रति सत्य कही ਖਸਮ ਉਹ ਜਦ ਬੋਏ ਸਭ ਕੁਝ ਖਸਮ ਹੋਈ ਪੈਦਾ ਸਤ ਸਭ ਕੁਝ ਪੈਦਾ ਹੋਇਆ ਹੈ ਆਦ ਵਿੱਚ ਸੱਚੇ ਸੀਗਾ ਜੋ ਦਿਖ ਰਿਹਾ ਜੋ ਪ੍ਰਗਟ ਸਾਡੇ ਸਾਹਮਣੇ ਪੈਦਾ ਹੋਇਆ ਹੈ ਆਦ ਵਿੱਚ ਕਲਰ ਛੱਟ ਵੀ ਉਹ ਥਾਈ ਵੀ ਕੁਝ ਇਹਦਾ ਮਤਲਬ ਪ੍ਰਗਟ ਪੈਦਾ ਹੋਇਆ ਹੈ ਜੋ ਵੀ ਕੁਝ ਹੋਇਆ ਚਾਹੇ ਉਹ ਆਤਮਾ ਹੈ ਚਾਹੇ ਪ੍ਰਾਤਮਿਕ ਚਾਹੇ ਚੇਤਨਾ ਹੈ ਚਾਹੇ ਜੜ ਹੈ ਸਭ ਉੱਥੇ ਪੈਦਾ ਹੋਇਆ ਹੈ ਉਹ ਕੰਪਨ ਖਸਮ ਕਾ ਇਹ ਖਾਸ ਤੌਰ ਉੱਪਰ ਨੂੰ ਪਛਾਣ ਲਵੇ ਅੰਤਰੇ ਆਤਮਾ ਦੀ ਆਵਾਜ਼ ਨੂੰ ਪਛਾਣ ਕੇ ਚੱਲੇ ਤਾਂ ਸੱਚ ਤਾਂ ਕੋਈ ਫੇਰ ਕੋਈ ਸੱਚ ਵੀ ਪ੍ਰਾਪਤੀ ਕਰ ਸਕਦਾ ਤਾਂ ਕਿਤੇ ਹਉਮੈ ਨੂੰ ਪਛਾਣੇ ਸੱਚੇ ਨੂੰ ਪਛਾਣੇ ਸੱਚ ਗੁਰ ਚੱਲੇ ਤਾਂ ਹੀ ਕੁਝ ਪ੍ਰਾਪਤੀ ਹੈ ਸੱਚ ਦੀ ਪ੍ਰਾਪਤੀ ਹੈ ਵੱਲੋਂ ਬਾਹਰ ਆਪਣੇ ਭਾਵੇਂ ਚੱਲੇ ਤੇ ਤਾਂ ਕੋਈ ਪ੍ਰਾਪਤੀ ਨਹੀਂ ਸੱਚ ਦੀ ਪ੍ਰਾਪਤੀ ਹੋਣੀ ਤਾਂ ਕੂੜ ਹੈ ਕੂੜ ਰਾਜਾ ਕੂੜ ਪਰਜਾ ਕੂੜ ਜਨ ਜਾਲ ਨਾਲ ਜੁੜਿਆ ਕੂੜ ਬੱਲੇ ਕੋਊਗਾ ਛੱਤ ਬੱਲੇ ਨਹੀਂ ਆਪ ਪਛਾਣੀਏ ਬੁਰਾ ਨ ਦੀਸੈ ਕੋਏ ਨਾਨਕ ਗੁਰਮੁਖ ਨਾਮ ਧਿਆਈ ਐ ਸੋਈ ਉਹ ਇਹਨਾਂ ਕਿਸੇ ਰੱਬ ਕਹਿੰਦੇ ਨੇ ਉੱਪਰ ਕਹਿੰਦਾ ਨਾ ਬਹੁਤ ਕੁਛ ਗੁਰਮੁਖੀ ਆਪ ਪਛਾਣੇ ਗੁਰਮੁਖਾਂ ਨੇ ਆਪਣਾ ਪਛਾਣੇ ਉਹਨਾਂ ਨੇ ਆਤਮਾ ਕਿ ਉਹ ਤਰਨ ਪੁਛਾਲਦੇ ਨੇ। ਸ਼ਰੀਰ ਚੋਂ ਜਾਤਾਂ ਜੋਤ ਜੋਤ ਮੈਂ ਜਾਂਤਾ ਜੋਤ ਗੋਲ ਨੂੰ ਜਾੜੇ ਦੀ। ਉਹ ਬੋਰਾ ਦੀ ਸਮਝ ਤੇ ਕਿਸੇ ਗੱਲ ਕਰਦੇ ਨੇ ਵੀ ਆ ਜਿਹੜੀ ਕਿਰਤ ਪਏ ਹੋਇਆ ਤੁਸੀਂ ਥੰਸਤ ਬਣ ਕੇ ਜੋ ਲਾਭ ਨਹੀਂ ਆ ਤੁਹਾਨੂੰ ਤੇ ਕੁਪੱਲੇ ਪਊਗਾ। ਦੱਸੋ ਬਈ ਸਾਨੂੰ ਕੀ ਤਕਲੀਫ ਹੈ ਦੁਖਾਣ ਨੂੰ ਕੁਪੱਲੇ। ਕਿ ਉਹਨ ਫੇਰ ਵੀ ਬੋਰਾ ਬਣੂ। ਉਹ ਕੁਰਬਾਨੀ ਦਾ ਭਰੇ ਦਾ ਪਨਾ ਕਰਦੀ ਐ ਉਹ ਉਲਟੇ ਰਾਤ ਨੂੰ ਹਟਾਉਂਦੀ ਐ ਕਿ ਤੈਨੂੰ ਦੁੱਖ ਨਾ ਹੋਵੇ ਤੂੰ ਵੀ ਸੁਖੀ ਹੋਵੇ ਤੇ ਇਹਨੂੰ ਵੀ ਉਹ ਕਹਾਂ ਵੀ ਸਾਡੂੰ ਸਾਡੇ ਤੇ ਜੀ ਦਇਆ ਕਰਦੇ ਜੇ ਪਤਾ ਨਹੀਂ ਬੁਰਾ ਬੰਦੇ ਨੇ ਬੁਰਾ ਵਾਲਾ ਨਹੀਂ ਬੰਦੇ ਗੁਰਮੁਖ ਖੋਜ ਕੇ ਜੀ ਉਹ ਅੱਧੂਲੇ ਲੈਵਲ ਤੇ ਦੇਖਦੇ ਨੇ ਕਿ ਇਹਨਾਂ ਦਾ ਵੀ ਭਲਾ ਹੀ ਹੋਵੇ ਸਭ ਦਾ ਸਰਬੱਤ ਦਾ ਭਲਾ ਚਾਹੁੰਦੇ ਨਹੀਂ ਜੀ ਉੱਤੇ ਚਾਹੁੰਦੇ ਹੁੰਦੇ ਜੀ ਕਹਿਣਾ ਚਾਹਣ ਤੇ ਫਰਕ ਹੈ ਚਾਹਣਾ ਕਹਿਣਾ ਦਾ ਦੋ ਅੱਡ ਉਲਟੀ ਸਖਿਆ ਦੇਣੀ ਸਰਬੱਤ ਦਾ ਭਲਾ ਨਹੀਂ ਹੈ। ਉਲਟੀ ਸਖਿਆ ਦੇਣੀ ਦਾ ਹੁਰ ਮਤੋਂ ਗੱਲਾਂ ਕਰਨੀਆਂ ਤਾਂ ਉਹਦਾ ਨਾਸ ਕਰ ਦਿੰਦੀ ਹੈ। ਗਰੀਬਾਂ ਦੇ ਨਾਲੇ ਪੈਸੇ ਨਾਲੇ ਉਹਦਾ ਨਾਸ ਕਰਤਾ। ਉਹਦਾ ਜਿਹੜਾ ਫਿਰ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ। ਉਹ ਮਤ ਤਾਂ ਆਪਣੇ ਟੀਲੇ ਨੂੰ ਖਾਣ ਵਾਲੀ ਹੈ। ਆਪਣੇ ਜਿਹੜੇ ਜਿੰਨਾਂ ਨੂੰ ਚਾਏ ਨੇ ਉਹਨਾਂ ਨੂੰ ਖਾਣ ਵਾਲੀ। ਉਹਨਾਂ ਦੀ ਗੁੱਡੀ ਦਾ ਨਾਸ ਕਰਨ ਵਾਲੀ ਹੈ। ਫਿਰ ਜਲੀਟ ਕਰਕੇ ਥੋੜੀ ਤਾਂ ਉਹਨਾਂ ਦਾ ਗਿਆਨ ਖਾਗੇ। ਨਮਸਕਾਰ, ਦਾਕਲ ਦਾ ਨਮਸਕਾਰ ਕਰਦਾ ਹਾਂ ਬੁਰਾ ਨਾ ਦੀਸੇ ਕੋਈ ਦਾ ਭਾਵ ਹੈ ਕਿ ਉਹ ਕਿਸੇ ਨੂੰ ਬੁਰਾ ਜਾਣ ਕੇ ਉਪਦੇਸ਼ ਨਹੀਂ ਭਲਾ ਨੇ। ਜਿਹਦਾ ਕਰ ਗੁੱਸਾ ਖਾਣ ਗੁੱਸਾ ਵੀ ਕਰਦੇ ਹੋ, ਵੀ ਉਹ ਕਿਉਂ ਕਰਦੇ ਨੇ? ਉਹ ਕਿਹੜੇ ਵੀ ਭਲਾਏ ਦੇ ਵਿੱਚ ਥੋੜਾ ਜਿਹੀ ਲਿਆਣਾ ਵੀ ਪਹਲਾ ਇਹਦੇ ਵਿੱਚ ਹੀ ਹੈ ਸਭ ਦਾ ਪਹਲਾ ਸੋਚੋ ਤਾਂ ਸਭ ਥੋੜਾ ਭਲਾ ਹੋਊਗਾ ਉਹ ਤਾਂ ਉਪਦੇਸ਼ ਕਰ ਰਿਹਾ ਡਿੱਕਰ ਰਹਿ ਰਹੇ ਰਿਹਾ ਜੀ ਸਹੀ ਨਾਮ ਦੇ ਵਿੱਚ ਰੱਖਿਆ ਆਪਣਾ ਪਰ ਨਾਮ ਦੀ ਉਹ ਸਾਖਰੀ ਗੱਲ ਕਰ ਰਹੇ ਨੇ ਉਹ ਤੁਹਾਡਾ ਧਿਆਨ ਵੀ ਨਾਮ ਨਾਲੇ ਜੋੜ ਰਹੇ ਨੇ ਵੀ ਨਾਮ ਇੱਧਰ ਜੁੜਜੋ ਸਾ ਉਹ ਸੁਖ ਦੇ ਵਿੱਚ ਨੇ ਆਪਕੋ ਆਇਆ ਜਿਹੜਾ ਨਿਕਲ ਕੇ ਹੀ ਗਿਆ ਆਲੀ ਵਸਤਾ ਚ ਉਹਨਾਂ ਨੂੰ ਪਤਾ ਵੀ ਇਹ ਚੀ ਕੀ ਹੈ ਹਾਲਤ ਹੈ ਹੁਣ ਕੀ ਹੈ ਉਹ ਆਪਣੇ ਵਰਗੇ ਸੁਖ ਸਾਧੇ ਤੁਮ ਡੋਲਰ ਵੀ ਤੇ ਆਇਆ ਤੁਹਾਡਾ ਆਉਣਾ ਵੀ ਸਹਿਲਾ ਹੋ ਜੇ ਤੁਸੀਂ ਵੀ ਧਿਆਨ ਦੇ ਵਿੱਚ ਰੱਖੋ ਸਾਚੇ ਜਿ ਧਿਆਨ ਰੱਖੋ ਤੇ ਆਤਮਾ ਨਾਲ ਜੁੜੇ ਰਹੋ ਹਾਂਜੀ ਮਹੱਲਾ ਚੌਥਾ ਸਵਨਾ ਦਾਤਾ ਆਪ ਹੈ ਆਪੇ ਮੇਲਨ ਹਾਰ ਨਾਨਕ ਸ਼ਬਦੀ ਮਿਲੇ ਨਾ ਵਿਛੜੈ ਜਿਨਾਂ ਸੇਵਿਆ ਹਰ ਦਾਤਾਰ ਤੁਮ ਸਵਨਾ ਦਾਤਾ ਜੇ ਇੱਥੇ ਕਬੂਲ ਤੁਸੀਂ ਸਵਨਾ ਦਾਤਾ ਤੁਮ ਸਵਨਾ ਜੇ ਬੀਚ ਕੀ ਇਹ ਸਾਰੇ ਆਦਮੀ ਦੀਨਾ ਕੱਲੇ ਆਉਂਦੇ ਸਾਰੇ ਦੀਜਤ ਆ ਜਾਂਦੇ ਆਦਮੀ ਆਜ਼ੀ ਨੂੰ ਉਪਦੇਸ਼ ਕਰ ਸਕਦਾ ਵੋਲ ਨਹੀਂ ਕਰ ਸਕਦਾ ਫਿਰ ਕੋਈ ਸ਼ਰੀਰ ਕਲੋੜਾ ਦੀ ਪੂਰੀਆਂ ਕਰਦਾ ਮਾਰੇ ਆਂਦੀਆਂ ਲੋੜਾਂ ਦੀ ਪੂਰੀਆਂ ਕਰਦਾ ਸਰਬੋਤਮ ਕੁਰਮਤ ਦਾ ਉਹ ਤੇ ਇਹ ਕਰ ਸਕਦਾ ਹੈ ਕਿ ਆਪ ਹੈ ਆਪੇ ਮਿਲਣ ਆਪੇ ਮਿਲਣ ਹਾਰ ਹੁਕਮ ਆਪਣੇ ਨਾਲ ਆਪ ਬੁਲਾਉਂਦਾ ਹੁਕਮ ਨਾਲ ਜੀ ਤੱਕੇ ਨਾ ਹੁਕਮ ਦਾ ਪ੍ਰਗਟ ਹੋ ਗੋ ਉਹ ਆਪਣੀ ਮਰਜ਼ੀ ਨਾਲ ਪ੍ਰਗਟ ਹੋਊਗਾ ਜੇ ਕਹੂਗਾ ਨਾ ਇੱਕ ਹੋਇਆ ਰਹੂਗਾ ਤਾਂ ਹੁਕਮ ਪ੍ਰਗਟ ਹੋ ਗਏ ਆਪੇ ਜਦ ਉਹਦੀ ਮਰਜ਼ੀ ਉਹ ਲਾ ਲਊਗਾ ਮਨ ਲਾਊਗਾ ਆਪੇ ਮੇਲਣਗਾ ਦਾਣ ਕੇ ਸ਼ਬਦ ਮਿਲੇ ਸਭ ਹੀ ਛਿੜੇ ਜਿਹੜੇ ਉਸ ਸ਼ਬਦਾਂ ਨਾਲ ਮਿਲੇ ਫੇੜੀ ਵਿਚੜਦੇ ਕਦੇ ਵੀ ਉਹ ਜਿਨ ਸੇਵਾ ਹਰ ਦਾਣ ਫੈਮੰਦੀ ਨੇ ਹਰ ਸੇਵ ਲਿਆ ਸਾਧਗੁਰੂ ਦੀ ਸੇਵਾ ਕਰਨ ਦੀ ਸਾਧਗੁਰੂ ਦੀ ਸੇਵਾ ਛਪਨਾ ਹੈ ਇਹ ਕੋ ਕਰੇ ਕਿਤਨਾ ਹੈ ਜਿਨਾ ਹੈ ਹਰ ਦੀ ਸੇਵਾ ਤੰਵੀਨ ਪਹਿਣਾ ਸਤਗੁਰ ਦੀ ਉਹਨਾਂ ਨੂੰ ਬੁਲਾ ਲੈਂਦਾ ਸ਼ਬਦ ਉਹਨਾਂ ਨੂੰ ਪਰਮੇਸ਼ਰ ਬੁਲਾ ਲੈਂਦਾ ਤੇ ਇਹ ਦੀਓ ਬਿਛੜ ਜਾਂਦੇ ਆਪਣੇ ਮੂਲ ਉਹ ਹਮੇਸ਼ਾ ਲਈ ਕੀ ਹੋਏ ਰਹਿੰਦੇ ਹਾਂਜੀ ਗੁਰਮੁਖੀ ਹਿਰਦੈ ਸ਼ਾਂਤ ਹੈ ਨਉ ਉਗਵੇ ਆਇਆ ਜਬ ਤਬ ਤੀਰ ਸੰਜਮ ਕਰੇ ਮੇਰੇ ਪ੍ਰਭ ਪਾਇ ਗੁਰਮੁਖ ਦੇ ਹਿਰਦੇ ਵਿੱਚ ਸ਼ਾਂਤ ਹੈ ਗੁਰਮੁਖ ਇਹ ਜਿਹੜਾ ਗੁਰੂ ਕੀ ਬੁੱਧਾ ਉਹਦੇ ਹਿਰਦੇ ਸ਼ਾਂਤੀ ਹੈ ਉਹਨੂੰ ਕੋਈ ਪਰੇਖਣਾ ਨਹੀਂ ਹੈ ਕੋਈ ਉਹਦੀ ਚਿੰਤਾ ਨਹੀਂ ਹੈ ਕੋਈ ਮਾਇਆ ਦੀ ਭੁੱਖ ਨਹੀਂ ਆਇਆ ਉਹਦੇ ਤਾਂ ਰੂਪ ਪ੍ਰਗਟ ਹੋ ਗਿਆ ਹੋ ਗਿਆ ਦੇਖੋ ਉਹਨੂੰ ਕਾ ਦਿਖੋ ਤਾਂ ਤੇ ਪੂਰੀਆਂ ਨੇ ਕਿੱਪ ਤੱਕ ਹੀਰਤ ਵਰਜ ਕਰੇ ਮੇਰੇ ਪਰਪਾਇਮ ਉਹ ਐਂ ਜੱਪ ਤੱਕ ਵੀ ਕਰਦਾ ਸੀ ਕੀ ਇਹ ਨਹੀਂ ਕਰਦਾ ਸਾਕੇ ਵੜੀ ਉਹਨੂੰ ਲੋੜ ਕਰਨੀ ਉਹ ਤਾਂ ਮੇਰੇ ਪ੍ਰਭ ਦੀ ਤੇ ਭੌਣੇ ਚ ਜਾਂਦਾ ਵਸ ਉਹਦੀ ਇੱਛਾ ਅਲੇ ਵਿੱਚ ਰਹਿਣਾ ਉੱਥੇ ਉਹਦਾ ਸਿਰ ਤਾਂ ਉੱਥੇ ਜਾਪ ਉੱਥੇ ਦਾਤ ਉੱਥੇ ਸੰਜਗੋ ਸਭ ਕੁਝ 'ਚ ਵਿੱਚ ਆ ਗਿਆ ਉਹਨੂੰ ਨਹੀਂ ਲੋੜ ਬਾਹਰ ਨੂੰ ਜਪ ਦੀ ਤੇ ਤਪ ਦੀ ਤੇ ਤੀਲ ਮੇਰਾ ਪ੍ਰਭ ਭਾ ਗਿਆ ਹਰ ਪ੍ਰਭ ਭਾ ਗਿਆ ਉਹ ਕਿਸੇ ਕੀਤੀ ਲੋੜ ਅੱਤੇ ਉੱਗਣ ਦੀ ਗੱਲ ਹੈ ਜੀ ਗੁਰਮੁਖ ਖੇੜ ਦਾ ਸ਼ਾਂਤ ਹੈ ਨਾਉ ਕੁਮਾਇਆ ਜਥਾ ਹੀ ਹਿਰਦਾ ਸ਼ਾਂਤ ਨਹੀਂ ਜਥਾ ਹੀ ਨਾਉ ਦੀ ਪ੍ਰਾਪਤੀ ਨਹੀਂ ਹੈ ਜੀ ਜੀ ਪਰ ਅਸੀਂ ਤਾਂ ਪਹਿਲਾਂ ਕਹਿੰਨੇ ਆ ਹੋ ਫਿਰ ਇਹ ਤਾਂ ਕੰਮ ਉਲਟਾ ਹੋ ਗਿਆ ਜੀ ਜਿੱਦਾਂ ਜਿਹੜਾ ਕੁਰਸੀ ਤੇ ਅਹੰਕਾਰ ਕੁਰਸੀ ਤਾਂ ਖਾਲੀ ਪਰ ਸਮ ਕਿਹਾ ਤਾਂ ਹੀ ਜਾਂਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਤੁਹਾਡੀ ਦੂਰ ਹੋ ਜੂਗੀ ਜਪ ਹੋਮੇ ਖੋਈ ਉਹ ਤਾਂ ਉਹ ਹੀ ਜਿਹੜੇ ਉੱਤੇ ਦਿੱਤੇ ਹੋਏ ਨੇ ਗੁਰਬਾਣੀ ਪੜ੍ਹ ਕੇ ਪਹਿਲਾਂ ਸ਼ਾਂਤੀ ਆਊਗੀ ਹਿਰਦਾ ਮਨ ਟਿਕੂਗਾ ਉਸ ਤੋਂ ਬਾਅਦ ਨਾਮ ਉਗੂਗਾ ਨਾਮ ਪਦਾਰਥ ਹੈ ਨਾ ਜੀ ਇਹ ਬਿਲਕੁਲ ਬਿਲਕੁਲ ਉਹ ਕਮ ਪ੍ਰਗਟ ਹੋਊਗਾ ਉਹ ਕਮ ਜਾਊਗਾ ਦਿਨ ਕਰਨ ਨਾਲ ਤੇ ਠੀਕ ਹੈ ਜੀ ਜੋ ਅਸੀਂ ਫਿਲਾਸਫੀ ਬਣਾਈ ਹੈ ਕਿ ਪਹਿਲਾਂ ਨੌਂ ਚੱਪੋ ਫਿਰ ਹਮੇ ਜਾਓ ਇਸ ਤੋਂ ਇਹ ਗੱਲ ਉਲਟ ਹੈ ਬਿਲਕੁਲ ਹਾਂਜੀ ਉਹ ਦਾ ਪ੍ਰਸੂਜ ਨੂੰ ਮਤਾਲੀਆ ਨਾ ਪਾਇਆ ਜਾਵੇ ਕਰ ਲਿਆ ਤਾਂ ਗਲਤ ਹੋਈਦਾ ਜੀ ਉੱਥੇ ਡੜੀ ਜਾਂ ਹਾਂਜੀ ਫਿਰਦਾ ਸੁਧ ਹਰ ਸੇਵ ਦੇ ਸੋਹ ਗੁਣ ਗਾਇਆ ਮੇਰੇ ਹਰ ਜੀ ਉਹ ਏਵੇਂ ਗੁਰਮੁਖ ਤਰਾਇਆ। ਜੇ ਬੇਸੋ ਦਾਰ ਖੈਮ ਦੇ ਕਿਰਦਾ ਚੋ ਦੋਵੇ। ਫਿਰ ਹਰਦੀ ਸੇਵਾ ਕਰੇ। ਫਿਰ ਜਪੁਨੇ ਤੇ ਚਾਰ ਕਰੇ ਹਰਦੀ ਸੇਵਾ ਗਿਣ ਸਕਦੇ ਵਿਚਾਰ ਕਰੇ। ਛੋਟੇ ਹਿਲ ਦੇ ਬਿਨਾ ਵਿਚਾਰ ਨਹੀਂ ਹੋ ਸਕਦਾ। ਜੇ ਕਰਦਾ ਤਾਂ ਉਹ ਨੂੰ ਨਹੀਂ ਲੱਗਦਾ। ਸੋਚ ਵਿਚਾਰ ਕਰਦੇ ਦੇ, ਪੂਰੇ ਵਿਦਵਾਨ ਵੀ ਕਰਦੇ ਨੇ ਗੁਰਬਾਣੀ ਨੂੰ ਵਿਚਾਰਦੇ। ਪਰ ਇਹਦਾ ਸਤਿ ਨਹੀਂ ਆ। ਇਹਦਾ ਸਤਿ ਗੁਰਮੁਖ ਤੇ ਬਿਨਾ ਇਹਦਾ ਸਤਿ ਨਹੀਂ ਹੋ ਸਕਦਾ। ਇਹਦਾ ਸਤਿ ਉਹ ਗੁਰਮੁਖ ਹੋਵੇ। ਜੋ ਆ ਕੋਣ ਦਾ ਆ ਉਹ ਗੁਣ ਸੋਹਣੇ ਨੇ ਪਰ ਸੋਹਣੇ ਲੱਗਦੇ ਉਹਨਾਂ ਦਾ ਕੋਣ ਦਾ ਆ ਇਹ ਸਤਲਾ ਉਹਨਾਂ ਨੇ ਕੋਣ ਵਿਚਾਰੇ ਨੇ ਉਹ ਵੀ ਗੁਣਾ ਸਮਝ ਸਕੇ ਜਿਹੜੇ ਸਾਥ ਵੀ ਦੇ ਨੇ ਉਹ ਹੀ ਸੋਹਣੇ ਲੱਗਦੇ ਮੇਰੇ ਹਰ ਜੀਉ ਇਹਦੇ ਭਾਗ ਦਾ ਮੇਰੇ ਹਰ ਜੀਉ ਨੂੰ ਵੀ ਇਹ ਲਈ ਪੁੰਗ ਲੱਗਦਾ ਗੁਰੂ ਤਰੇ ਨੇ ਕਿਤੇ ਗੁਰੂਖਰੀ ਭਣੇ ਤਲ ਨਹੀਂ ਸਕਦੇ ਬਾਬਾ ਮਰਮ ਕਰਮਤ ਆਰਦੇ ਜੀ ਜੀ ਬੁੱਧੀ ਨੇ ਗੁਰਮੁਖੀ ਬਣਨਾ ਹੈ ਜੀ ਜਦ ਗੁਰਮੁਖੀ ਬੁੱਧੀ ਹੋ ਗਈ ਉਹ ਤਰਦ ਆਪਦੀ ਦਾ ਬਦਲ ਮਨ ਬਦਲੀ ਸਿੱਧ ਕੀ ਹੈ ਕਿਵੇਂ ਠੀਕ ਹੈ ਜੀ ਨਾਨਕ ਗੁਰਮੁਖੀ ਮੇਲੀ ਹੈ ਨਾ ਹਰ ਦਰ ਸੁਹਾਇਆ ਗੁਰਮੁਖੀ ਮੇਲੀ ਜਦੋਂ ਬਲਾਹਾ ਕੋ ਗੁਰੂ ਘਰ ਆ ਗੁਰੂ ਘਰ ਨਾਲ ਆਪਰੇ ਇੱਕ ਦੀ ਬੈਠੇ ਸਾਰੇ ਇੱਕੋ ਗੱਲ ਆਉਣਾ ਨਹੀਂ ਸਭਿਆਂ ਨੂੰ ਹਰਦਰ ਸੁਹਾਇ ਸਾਰੇ ਸੱਚਖੰਡੇ ਬੈਠੇ ਨੇ ਜਿਉਂ ਜਿਉਂ ਸੱਚਖੰਡ ਹੋਦੇ ਨੇ ਉਹਦਾ ਜਿਹੜਾ ਹਿਰਦਾ ਹਿਰਦਾ ਹੀ ਸੱਚਖੰਡ ਹੁੰਦਾ ਹੈ ਜਾਂਦਾ ਤੇ ਹਿਰਦਾ ਸੁਧ ਹੋ ਗਿਆ ਸੱਚਖੰਡ ਹੋ ਗਿਆ ਹਿਰਦੇ ਚੁੱਧ ਕਲਮਾ ਮਤਲਬ ਹੈ ਸੱਚਖੰਡਾ ਠੀਕ ਹੈ ਜੀ ਸੱਚਖੰਡ ਸੱਚ ਹੰਕਾਰ ਫੈਦਰਾਕਾਰ ਹੋ ਕੇ ਕੋਕ ਹੋ ਕੇ ਫਿਰ ਵਾਜਨ ਦੇ ਇਹ ਤਾਂ ਸ਼ੁੱਧ ਨਹੀਂ ਹੈ ਇਹ ਇੱਕ ਖੰਡ ਹੋ ਜੂਗਾ ਨਾਕਾਰ ਚੰਗਾ ਹੋ ਜੂਗਾ ਇਹ ਤਾਂ ਸ਼ੁਰੂ ਪਹਿਲਾਂ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ